ਦਨਸਤ ਗੁਰ ਰਾਮ ਸਿੰਘ ਦਨਸਤ ਗੁਰ ਜੀ ਜੀ ਸਾਧ ਸੰਗਤ ਜੀ ਮੈਂ ਕੋਈ ਆਪ ਜੀ ਦੇ ਬੜੇ ਭਗਸ਼ਾਲੀ ਹੋਏ ਐਸੇ ਸੰਤ ਪਰਿਵਾਰ ਚ ਜਮੇ ਹੋ ਜੇ ਨਾ ਸਤ ਦੇ ਬਾਰੇ ਇਤਨਾ ਕੁਝ ਪਤਾ ਹੈ ਮੈਨੂੰ ਤਾਂ ਬਹੁਤ ਥੋੜਾ ਪਤਾ ਹੈ ਪਰ ਫਿਰ ਵੀ ਮੈਂ ਸਾਧ ਸੰਗਤ ਜੋ ਕੁਝ ਮੈਨੂੰ ਦੱਸਿਆ ਮੈਂ ਤਾਂ ਉਥੋਂ ਹੀ ਥੋੜਾ ਗਿਆਨ ਲਿਆ ਜਿਸ ਤਰ੍ਹਾਂ ਮੈਂ ਇਹ ਜਿੱਥੇ ਜਿੱਥੇ ਸਤਿਗੁਰੂ ਦਾ ਨਾਮ ਹੁੰਦਾ ਹੈ ਮੈਂ ਦੇਖਿਆ ਉੱਥੇ ਬਰਕਤ ਵੀ ਪੈਂਦੀ ਹੈ ਉੱਥੇ ਰਕਸ਼ਾ ਵੀ ਹੁੰਦੀ ਹੈ ਉੱਥੇ ਬਹੁਤ ਕੁਝ ਹੁੰਦਾ ਹੈ ਹੁਣ ਸੰਧਿਆਲ ਸਿੰਘ ਜੀ ਨੇ ਜ਼ਿਕਰ ਕੀਤਾ ਕਿ ਇਹ ਜਿਹੜੀ ਸਤਗੁਰਾਂ ਦਿੱਤੀ ਮਾਲਾ ਹੈ ਇਹ ਲੋਕੀ ਲੈ ਕੇ ਨਹੀਂ ਚੱਲਦੇ ਇੱਥੇ ਅਗ ਲੰਦਰ ਮੈਂ ਤੁਹਾਨੂੰ ਅਸੀਂ ਮਾਲਾ ਦੀ ਇੱਕ ਸਾਖੀ ਸੁਣਾਣਾ ਇਹ ਮਾਲਾ ਕਿੰਨੀ ਰੱਖਿਆ ਕਰਦੀ ਹੈ ਕਿੰਨਾ ਕਿਰਪਾ ਕਰਦੀ ਹੈ ਗਵਾਰੀਅ ਦੇ ਸੁਭਾਜੀ ਦੇ ਪਰਿਵਾਰ ਇੱਕ ਵਾਰੀ ਉਥੋਂ ਚੰਬਲ ਵੈਲੀ ਤੋਂ ਜਾ ਰਿਹਾ ਸੀ ਤੇ ਤਿੰਨ ਗੱਡੀਆਂ ਸਨ ਇੱਕ ਗੱਡੀ ਖਰਾਬ ਹੋ ਗਈ ਤੇ ਉਹ ਡਾਕੂਆਂ ਦਾ ਇਲਾਕਾ ਸੀ ਬੜੇ ਘਬਰਾ ਗਏ ਬਈ ਉਹ ਕਹਿਣ ਲੱਗੇ ਚਲੋ ਐਕਸ਼ਨ ਕਰਿਓ ਇੱਕ ਚ ਇੱਕ ਬਜ਼ੁਰਗ ਤੇ ਦੋ ਤਿੰਨ ਬੀਬੀਆਂ ਤੇ ਬੱਚੇ ਛੱਡ ਕੇ ਉਹ ਗੱਡੀ ਚਲੀ ਗਈ ਸੀ ਪੁਲਿਸ ਲੈ ਕੇ ਆਣੇ ਆ ਤੁਹਾਨੂੰ ਲੈ ਜਾਣੇ ਇਥੋਂ ਤੇ ਓਨੀ ਦੇਰ ਚ ਡਾਕੂਆਂ ਨੇ ਉਹ ਘੇਰ ਕਾਰ ਨੂੰ ਉਹ ਕਹਿਣ ਬਈ ਖੋਲੋ ਦਰਵਾਜ਼ਾ ਤੁਹਾਨੂੰ ਲੁੱਟੀਏ ਬੜੇ ਘਬਰਾ ਗਏ ਤੇ ਸੰਤਾ ਨੇ ਕਿਹਾ ਕਿ ਤੁਸੀਂ ਤੁਹਾਡੇ ਕੋਲ ਮਾਲਾ ਸਭ ਕੋਲ ਮਾਲਾ ਸੀ ਬੱਚਾ ਕੋਲ ਨਹੀਂ ਮਾਲਾ ਸੀ ਉਹਨਾਂ ਨੇ ਉਸੇ ਦੇ ਨਾਮ ਸਿਮਨ ਚਾਲੂ ਕਰਤਾ ਤੇ ਉਹ ਡਾਕੂ ਬੜੇ ਹੈਰਾਨ ਹੋਏ ਕਿ ਅਸੀਂ ਇਹਨਾਂ ਲੁੱਟਣ ਆਏ ਤੇ ਇਹ ਕਰਦੇ ਕੀ ਭੈਣ ਤੇ ਉਹਨਾਂ ਜਾ ਕੇ ਆਪਣੇ ਬਜ਼ੁਰਗ ਡਾਕੂ ਨੂੰ ਕਿਹਾ ਵੀ ਇਹ ਬੜੇ ਅਜਬ ਜਿਹੇ ਮੌਕਦ ਨਾਲ ਡਰਦੇ ਨਾ ਕੁਛ ਉਹ ਬਜ਼ੁਰਗ ਆ ਗਏ ਉਹਨਾਂ ਵੇਖਿਆ ਕਿ ਇਹ ਨਾਮ ਸਿਮਨ ਕਰ ਰਹਿਣ ਤੇ ਕਹਿਣ ਲੱਗੇ ਵੀ ਇਹ ਤਾਂ ਬੜੇ ਸੰਤ ਲੋਗ ਨੇ ਤੁਸੀਂ ਲੁੱਟਣ ਆਏ ਹੋ ਬੱਚਿਆਂ ਨੂੰ ਦੁੱਧ ਬਿਲਾਓ ਬੱਚਿਆਂ ਨੂੰ ਫਰੂਟ ਦਿਲਾਓ ਉਸੇ ਵale ਫਰੂਟ ਆ ਗਿਆ ਦੁੱਧ ਆ ਗਿਆ ਉਹ ਡਾਕੂ ਨੇ ਉਹਨਾਂ ਦੀ ਰੱਖਿਆ ਕੀਤੀ ਜਦ ਤੱਕ 4-6 ਘੰਟੇ ਬਾਅਦ ਪੁਲਿਸ ਨਹੀਂ ਆਈ ਇਹ ਸਤਗੁਰੂ ਦੀ ਹੈ ਤੇ ਮੈਂ ਤੁਹਾਨੂੰ ਮੇਰੀ ਨਹੀਂ ਹਿੰਮਤ ਨਹੀਂ ਪਰ ਫਿਰ ਮੈਂ ਤੁਹਾਨੂੰ ਕਹਾਂਗਾ ਕਿ ਉਹ ਸੰਤਾ ਨੇ ਕਿਹਾ ਤੁਸੀਂ ਆਪਣੀ ਮਾਲਾ ਆਪਣੇ ਕੋਲ ਰੱਖੋ ਇਹ ਤੁਹਾਡੀ ਬੜੀ ਰੱਖਿਆ ਕਰੇਗੀ ਬਾਕੀ ਜਿੱਥੇ ਸਤਗੁਰੂ ਦੀ ਤਸਵੀਰ ਲੱਗਦੀ ਹੈ ਤੇ ਇਹ ਸਮਝੋ ਸੇ ਤਸਵੀਰ ਹੈ ਉੱਥੇ ਸਤਗੁਰੂ ਹਾਜ਼ਰ ਨਾਜ਼ਰ ਹੁੰਦੇ ਜਿਸ ਸਮੇਂ ਮੈਂ ਤੁਹਾਨੂੰ ਪਿੱਛੇ ਸ਼ਾਇਦ ਸਾਕੀ ਸੁਣਾਈ ਹੋਏ ਕਿ 사ਤਗੁਰੂ ਦੀ ਤਸਵੀਰ ਦੇ ਅੱਗੇ ਨਾਮਦਾਰੀ ਤੇ ਦੁਕਾਨ ਤੇ ਲੱਗੀ ਹੋਈ ਤੇ ਖੁਲਿਆਂ ਨਾਲ ਕੰਮ ਸੀ ਤੇ ਉਹਨਾਂ ਨੇ ਉਹਦੇ ਸਾਹਮਣੇ ਬਹਿ ਕੇ ਮर्यादा ਨਾ ਸਮਝਦੇ ਹੋਏ ਸ਼ਰਾਬ ਦਾ ਸੇਵਨ ਕੀਤਾ ਆਵਾਜ਼ ਖਾਇਆ ਔਰ ਨਾਮਦਾਰ ਨੂੰ ਲੱਗ ਗਿਆ ਕਿ ਮੈਨੂੰ ਹੁਣ ਬੜੀ ਵੱਗ ਸਖਤ ਜਾਬ ਮਿਲਣੀ ਹੈ ਉਹਨੇ ਬੜਾ ਰੋਕਿਆ ਉਹ ਕਹਿੰਦੇ ਕੋਈ ਤਸਵੀਰ ਹੀ ਆ ਨਾ ਕੋਈ ਗੱਲ ਨਹੀਂ ਉਹਨੇ ਕਿ 사ਤਗੁਰੂ ਦਾ ਪਹਿਰਾ ਲੱਗਿਆ ਉਸ ਤੇ ਕੋਈ 2-4 ਹਫ਼ਤੇ ਬਾਅਦ ਹੀ ਚਾਰ ਪਾਕਿਸਤਾਨੀ ਬਦਮਾਸ਼ ਡਾਕੂ ਉਹਦੀ ਦੁਕਾਨ ਤੇ ਆ ਗਏ ਪਹਿਲੇ ਉਹਨਾਂ ਨੇ 10-10 ਡਾਲਰ ਦੇ ਅਕਸ਼ੇ ਲਿਆ ਪਰ ਉਹਨੂੰ ਜੱਗ ਗਿਆ ਕਿ ਮੈਨੂੰ ਇਹਨਾਂ ਸਤਗੁਰਾਂ ਨੇ ਸਜ਼ਾ ਨਹੀਂ ਦੇਣੀ ਹੈ ਦੂਸਰੇ ਤੀਸਰੇ ਦਿਨ ਉਹ ਸੂਰੇ ਆਇ ਇੱਕ ਬੀਬੀ ਆਈ ਸੀ ਉਹਨੇ ਕੋਈ 2000 ਡਾਲਰ ਦੇ ਬਾਟ ਲੈ 8000 ਬਾਟ ਤੇ ਇਹ ڈاکੂ ਤਿੰਨੋ ਵਿਚਾਰੂ ਅੰਦਰ ਆ ਕੇ ਇੱਕ ਪੈਰੇ ਤੇ ਖੜਾ ਹੋ ਗਿਆ ਉਹਨੇ ਚਾਕੂ ਦਿਖਾ ਕੇ ਉਸ ਬੀਬੀ ਦਾ ਗਹਿਣੇ ਵੀ ਲੁੱਟ ਲਿਆ ਪੈਸੇ ਵੀ ਲੁੱਟ ਲਿਆ ਉਸ ਨਾਮਦਾਰੀ ਸੰਤ ਨੂੰ ਮਾਰਨ ਵਾਸਤੇ ਚੱਲੇ ਬੀਬੀ ਨੇ ਕਿਹਾ ਨੂੰ ਮਾਰ ਦੇ ਲੁੱਟ ਲਾਓ ਉਹਨੇ ਤजोरी ਖੋਲhti 4-5 ਲੱਖ ਰੁਪਏ ਉਹਨੇ ਕਢ ਲਏ। ਉਹਦੇ ਪਿੱਛੇ ਕੋਈ 20 ਡਾਲਰ ਪੈਸੀ ਉਹਨੇ ਕਿਹਾ ਸਤਗੁਰੂ ਸੱਚੇ ਪਾਤਸ਼ਾਹ ਤੇ ਮੇਰੇ 파ਟਰਨ ਦੇ ਪੈਸੇ ਨੇ ਤੇ ਉਹ ਖੁੱਲੇ ਸੇਖੜੇ ਉਹ ਬੰਦੇ ਵੀ ਨਹੀਂ ਇਹਨਾਂ ਗੱਲਾਂ ਨੂੰ ਤੇ ਅਗਰ ਇਹ ਲੁੱਟ ਜੇ ਤਾਂ ਆਪ ਜੀ ਕਿਰਪਾ ਕਰੋ ਇਹ ਪੈਸੇ ਵਾਪਸ ਆ ਜਾ ਤੇ ਇੱਕ ਬੰਦਾ ਮੈਨੂੰ ਫੜਾ ਦਿਓ। ਉਹਨੇ ਆਕੇ ਜਿਸਲੇ ਪਿੱਛੇ ਹੱਥ ਵਾਰਿਆ ਤਾਂ ਉਹ 20 ਡਾਲਰ ਮਿਲ ਗਏ ਕਹਿੰਦਾ ਉਸਤਾਦ ਬਹੁਤ ਮਾਲ ਮਿਲ ਗਿਆ ਆਪਾਂ ਚਲਿਏ। ਉਹ ਜਾਣ ਲੱਗੇ ਉਹਨੇ ਉਹਨੂੰ ਕੈਂਚੀ ਫਾੜ ਕੇ ਲੰਮਾ ਪਾ ਲਿਆ ਥੱਲੇ ਪਾ ਲਿਆ ਤੇ ਉਹਨੇ ਕਿਹਾ ਮੈਨੂੰ ਬਚਾਓ ਦੂਜਾ ਬੰਦਾ ਆਇਆ ਉਹਨੇ ਸਿਰ ਇੱਕ ਸਿਰ ਤੇ ਪਟਕਾ ਸੀ ਦੂਸਰਾ ਸਿਰ ਤੇ ਉਹ ਜੁੜਾ ਸੀ ਉਹਨੂੰ ਅਸਰ ਕੋਈ ਨਾ ਹੋਇਆ ਉਹਨੇ ਆਪਣੇ ਨੌਕਰ ਨੂੰ ਕਿਹਾ ਵੀ ਇਹਦੇ ਸਿਰ ਤੇ ਜੋ ਹੈ ਮਾਰ ਉਹਨੇ ਇੱਕ ਲੋਹੇ ਦਾ ਸਟੂਲ ਮਾਰਿਆ ਉਹ ਬੰਦਾ ਪਾਗਲ ਡਿੱਗ ਪਿਆ ਤੀਜੇ ਨੇ ਆ ਕੇ ਉਹਦੇ ਚਾਕੂ ਮਾਰੇ ਬੁਰੇ ਤਰ੍ਹਾਂ ਖੂਨੋਂ ਖੂਨ ਕਰਤਾ ਤੇ ਉਹਦਾ ਹੱਥ ਛੁੱਟ ਗਿਆ ਉਹਨੂੰ ਲੈ ਕੇ ਚੱਲੇ ਜਿੱਤੇ ਤਿੰਨ ਬਾਹਰ ਵਾਲੀ ਖਲਗਤ ਜਮਾ ਹੋ ਗਈ ਜਿਸ ਵਲੇ ਤਿੰਨ ਬੰਦੇ ਬਾਹਰ ਨਿਕਲੇ ਉਹਨੇ ਉਸੇ ਵਲੇ ਉਹਦੀ ਚੌਥੇ ਬੰਦੇ ਦੀ ਪੇਟੀ ਫੜ ਕੇ ਥੱਲੇ ਲੰਮਾ ਪਾ ਲਿਆ ਉੱਥੇ ਡਿੱਗ ਪਿਆ ਆ ਬੇਹੋਸ਼ ਹੋ ਗਿਆ ਤੇ 4-5 ਲੱਖ ਰੁਪਇਆ ਉਹਦੇ ਕੋਲ ਮਿਲ ਗਿਆ ਪੁਲਿਸ ਨੇ ਆਇਆ ਉਹ ਮਾਰਿਆ ਕੁਟਿਆ ਤੇ ਦੋ ਬੰਦੇ ਕੋਈ ਉਹਨਾਂ ਰਾਤੀ ਕਰਾਚੀ ਜਾਣਾ ਸੀ ਉਹਨਾਂ ਕੋ ਟਿਕਟਾਂ ਸਨ ਪਾਕਿਸਤਾਨੀ ਪਾਸਪੋਰਟ ਸੀ ਉਹ 에어ਪੋਰਟ ਤੇ ਪਹਿਰਾ ਲੱਗ ਗਿਆ ਉਹ ਗਿਆ ਨਾ ਦੋ ਦਿਨਾਂ ਬਾਅਦ ਉਹ ਦੋ ਬੰਦੇ ਫੜੇ ਗਏ ਉਹਨਾਂ ਕੋ ਵੀਜ਼ਾ ਡਾਲਰ ਉਹ ਲੱਗ ਗਿਆ ਉਹਨੇ ਦੇਖਿਆ ਕਿ ਕਿ ਦੇਖੋ ਸਤਗੁਰੂ ਨੇ ਮੈਨੂੰ ਸਦਾ ਵੀ ਦਿੱਤੀ ਮੈਨੂੰ ਹੱਥ ਦੇ ਕੇ ਬਚਾ ਵੀ ਲਿਆ ਉਹ ਕਹਿੰਦਾ ਜੀ ਮੈਂ ਜਵਾਨ ਆਇਆ ਤੇ ਮੇਰਾ ਵੀ ਦਿਲ ਕੀਤਾ ਕਿ ਵੀ ਜਵਾਨ ਮੁੰਡੇ ਥੋੜੀ ਥੋੜੀ ਦਾੜ੍ਹੀ ਟ੍ਰਿਮ ਕਰ ਲਈਏ ਸੱਜਾ ਬਾਸ਼ਾ ਜੀ ਮੈਨੂੰ ਸਤਗੁਰੂ ਸਤਸੰਗਤ ਦੀ ਮਾਫ ਕਰਨਾ ਮੈਂ ਕੋਈ ਉਸਾਕੀ ਕਰ ਰਿਹਾ ਤਾਂ ਮੈਂ ਉਸਾਕੀ ਸੁਣਾ ਉਹ ਕਹਿੰਦੇ ਜੀ ਮੇਰਾ ਭੈਣ ਦਾ ਵਿਆਹ ਹੋਇਆ ਤੇ ਕੋਈ ਹਲੇ ਸਾਲ ਨਹੀਂ ਪਿਆ ਤੇ ਮੇਰੀ ਭੈਣ ਪਾਗਲ ਹੋ ਗਈ ਤੇ ਉਹ ਖੁਲਿਆਂ ਘਰ ਵਿਆਹ ਸੀ ਉਹ ਕਹਿੰਦੇ ਕਿ ਤੁਹਾਡਾ ਸਤਿਗੁਰੂ ਬੜਾ ਸਮਰਥ ਹੈ ਤੇ ਉਹਨਾਂ ਨੂੰ ਅਰਜ਼ ਕਰੋ ਕਿ ਭੈਣ ਤੁਹਾਡੀ ਪਾਗਲ ਹੈ ਸੀ ਇਲਾਜ ਕਰਾਇਆ ਸਾਢੇ 2 ਸਾਲ ਬੜੀ ਗਰਮਰ ਹੋ ਗਈ ਹੈ ਉਹਨੇ ਦਾੜੀ ਜਰਾ ਟ੍ਰਿਮ ਕੀਤੀ ਉਹ ਡਾਰੇ ਸਤਿਗੁਰੂ ਕੋ ਜਾਂਦੇ ਆਇਆ ਅਖੀਰ ਤੇ ਇੱਕ ਦਿਨ ਬੜੀ ਹਿੰਮਤ ਕਰਕੇ ਉਹ ਸਤਿਗੁਰੂ ਬੈਂਕੋ ਆਏ ਸੰ ਅੰਦਰ ਗਿਆ ਅਰਜ਼ ਕੀਤੀ ਉਸੇ ਭੈਣ ਦੀ ਉਹ ਕਹਿੰਨ ਲਗੇ ਵੀ ਗੱਲ ਹੈ ਤੁਸੀਂ ਪਹਿਲੇ ਆਪਣੀ ਦਾੜ੍ਹੀ ਸੰਭਾਲੋ ਦਾੜ੍ਹੀ ਬੜੀ ਸੋਹਣੀ ਲੱਗ ਰਹੀ ਹੈ ਪਰ ਦਾੜ੍ਹੀ ਨਾਲ ਬੰਨਣਾ ਕੁਛ ਨਹੀਂ ਦਾੜ੍ਹੀ ਸੰਭਾਲੋ ਬੈਨ ਆਪੇ ਸਮਝ ਜਾਏਗੀ ਉਹ ਬਾਹਰ ਹੁੰਦਾ ਆਇਆ ਬੈਨ ਮਾਂ ਨੇ ਕਿਹਾ ਕੀ ਹੋਇਆ ਕਹਿੰਦੇ ਸਤਿਗੁਰੂ ਕਿਰਪਾ ਕਰਤੀ ਉਹਨੇ ਆਪਣੀ ਦਾੜ੍ਹੀ ਕੱਟਨੀ ਬੰਨ ਕਰਤੀ ਬੈਨ ਆਪਣਾ ਠੀਕ ਠਾਕ ਬਿਲਕੁਲ ਹੋ ਗਿਆ ਉਹਦੇ ਅੱਜ 15 ਸਾਲ ਹੋ ਗਏ ਇੱਥੇ ਇੱਕ ਬੈਂਕ ਹੋਕ ਜਿਹਨੇ ਸ਼ਮਸ਼ੇਰ ਸਿੰਘ ਨਰੂਲਾ ਬੜਾ ਬੜਾ ਬੜਾ ਸੁਮਿਤ ਪਰਿਵਾਰ ਹੈ ਉਹਨਾਂ ਸਤਿਗੁਰੂ ਪ੍ਰਤਾਪ ਸਿੰਘ ਚੰਨਾ ਜੀ ਅਰਜ਼ੀ ਕੀਤੀ ਸੱਚੇ ਬਾਦਸ਼ਾਹ ਮੇਰੀ ਘੋਟੀ ਨੂੰ 4-5 ਸਾਲ ਤੋਂ ਛਪਾਕੀ ਚੱਲ ਰਹੀ ਹੈ ਆਪ ਜੀ ਕਿ ਉਹ ਕਹਿੰਦੇ ਦੌੜੀ ਰੰਗਣੀ ਬੰਦ ਕਰਦੇ ਚ ਵਾਕੀ ਦੂਰ ਹੋ ਜਾਏਗੀ ਐ ਸਤਿਗੁਰੂ ਜਗਦੀਸ਼ ਨੇ ਮੈਨੂੰ ਬਚਨ ਕੀਤਾ ਮੈਂ ਜਾ ਕੇ ਉਹਨਾਂ ਦੇ ਮੂੰਹ ਤੋਂ ਸੁਣ ਕੇ ਆਇਆ ਸਤਿਗੁਰੂ ਦੇ ਉੱਥੇ ਇੱਕ ਸੋਭਾਜੀ ਜਿਹੜੇ ਇੱਕ ਭੈਣ ਦਾ ਘਰ ਵਾਲਾ ਸੀ ਉਹ ਕਹਿੰਨੇਗਾ ਮੇਰਾ ਕੰਮ ਨਹੀਂ ਚੱਲਿਆ ਸਤਿਗੁਰੂ ਸੱਚੇ ਪਾਤਸ਼ਾਹ ਕੋਈ ਕਿਰਪਾ ਕਰੋ ਕਹਿੰਨੇਗਾ ਪੱਕ ਸਿੱਧੀ ਕਰ ਲੈ ਤੇ ਅਸੀਂ ਕਿਰਪਾ ਕਿਰਪਾ ਪੇ ਸਤਿਗੁਰੂ ਕਰ ਦੇਣਗੇ ਉਹਨੇ ਉਹਨਾਂ ਸਾਹਮਣੇ ਪੱਕ ਸਿੱਧੀ ਕਰ ਲਈ ਫਿਰ ਉਹਨੇ ਪੱਕ ਨੋਗ ਵਾਲੀ ਕਰ ਲਈ ਫਿਰ ਸਤਿਗੁਰੂ ਮਿਲਿਆ ਸਤਿਗੁਰੂ ਕਹਿੰਨੇਗੇ ਮੇਰਾ ਦਿਲ ਕਹਦਾ ਤੇਰੀ ਪਾਗ ਨੂੰ ਮੈਂ ਅਗ ਲਗਾ ਦੇ ਆ ਉਹ ਤੀਰ ਤਾਂ ਚੱਲ ਗਿਆ ਉਹ ਸਾਰਿਆਂ ਨੇ ਆ ਕੇ ਬਕਾਇਆ ਸਤਗੁਰੂ ਬਖਸ਼ੋ ਤੇ ਬੱਚੇ ਕੋਲ ਗਲਤੀ ਹੋ ਗਈ ਚਾਹ ਲਗਾ ਚਲੋ ਸਤਗੁਰੂ ਕਿਰਪਾ ਕਰਨਗੇ ਉਸ ਕੁਝ ਦਿਨਾਂ ਬਾਅਦ ਉਹ ਕਿਸੇ ਦੋਸਤ ਆਪਣੇ ਬੱਚੇ ਦੇ ਦੋਸਤ ਗਿਆ ਜਨਮ ਦਾ ਤਿਵਾਰ ਸੀ ਉੱਥੇ ਮੋਮਬਤੀਆਂ ਜਲ ਰਹੇ ਸਨ ਉਹ ਆਪਣਾ ਖਿੜਕੀ ਦੇ ਨਾਲ ਸਿਰ ਰੱਖ ਕੇ ਬਹਿ ਗਿਆ ਉਹ ਪੱਗ ਨੂੰ ਅਗ ਲਗਾਈ ਪੱਗ ਸੜ ਵੀ ਗਈ ਲੇਕਿਨ ਸਤਗੁਰੂ ਨੇ ਰੱਖਿਆ ਵੀ ਕਰ ਲਈ ਇਹ ਸਤਗੁਰੂ ਦੇ ਇੱਕ ਆਤਕ ਨੇ ਸਤ ਗੁਰੂਆਂ ਦੇ ਬੱਚਾਉਣ ਬੜੇ ਧਿਆਨ ਨਾਲ ਸੁਣੋ ਅੱਗੇ ਪਿੱਛੇ ਉਹਨੇ ਕੋਈ ਸ਼੍ਰੀ ਜੀਵਨਗਰ ਤੋਂ ਕਿਸਾਨ ਫਾਰਮਰ ਰਾਤੀ ਆਏ ਤੇ ਪ੍ਰਸ਼ਾਦਾ ਚੱਕਾ ਨਾਲ ਪਹੁੰਚੇ ਉੱਥੇ ਮਾਈ ਨੇ ਕਿਹਾ ਪ੍ਰਸ਼ਾਦਾ ਬਿਆ ਆ ਮੈਂ ਤੁਹਾਨੂੰ ਨਿਆ ਨਵਾਂ ਪ੍ਰਸ਼ਾਦਾ ਬਣਾ ਦੇਣੀ ਆ ਉਹ ਕਹਿੰਦਾ ਨਹੀਂ ਮਾਈ ਪ੍ਰਸ਼ਾਦਾ ਪ੍ਰਸ਼ਾਦਾ ਹੀ ਹੁੰਦਾ ਗੁਰੂ ਦਾ ਲੰਗਰ ਐ ਅਸੀਂ ਚੱਕ ਲਾਂਗੇ ਉਹ ਦੋਨੋਂ ਨੇ ਪ੍ਰਸ਼ਾਦਾ ਛੱਕਿਆ ਇੱਕ ਦੂਜੇ ਨੂੰ ਪੁੱਛਦਾ ਇਹ ਪ੍ਰਸ਼ਾਦਾ ਕਹਿਆ ਕਹਿੰਦਾ ਇਸ ਨੂੰ ਤਾਂ ਜੇਲ੍ਹ ਦੀ ਰੋਟੀ ਸਵਾਦੀ ਹੁੰਦੀ ਉਹਨਾਂ ਨੂੰ ਉੱਚੇ ਸਤਿਗੁਰੂ ਦਾ ਲੰਗਰ ਖਾ ਰਿਹਾ ਉਹ ਸਤਿਗੁਰੂ ਤੇ ਘਰ ਬੈ ਕੇ ਤੁਸੀਂ ਇਹੋ ਜੇ ਬਚਨ ਕਰੋ ਕੀ ਹੋਏਗਾ ਉੱਥੇ ਰਾਤੀ ਕਤਲ ਹੋ ਗਿਆ ਉਹ ਸਵੇਰੇ ਨਿਕਲੇ ਤੇ ਪੁਲਿਸ 잡ਦੀ ਪਈ ਉਹਨਾਂ ਦੋਨਾਂ ਨੂੰ ਫੜ ਕੇ ਅੰਦਰ ਘਾਤਾ ਤਿੰਨ ਮਹੀਨੇ ਉਹ ਅੰਦਰ ਰਹਿ ਤੇ ਉਹਨਾਂ ਨੂੰ ਯਾਦ ਆ ਗਿਆ ਸਤਿਗੁਰੂ ਨੇ ਕੀ ਅਸੀਂ ਬਚਨ ਕੀ ਕੀਤਾ ਕਰ ਸਤਿਗੁਰੂ ਨਾਲ ਫਿਰ ਕਿਰਪਾ ਕੀਤੀ ਉਹਨਾਂ ਨੂੰ ਬਖਸ਼ਿਆ ਮੈਂ ਹੁਣੇ ਇੱਥੇ ਆ ਕੇ ਸਾ ਸੰਗਤ ਕੋ ਸੁਣਿਆ ਕਿ ਰੀਡ ਦੇ ਗੁਰਦੁਆਰੇ ਚ ਉਹ ਰਾਮਗੜੀਆਂ ਨੇ ਸਤਿਗੁਰੂ ਦੇ ਆਸਨ ਤੇ ਕਹਿੰਦੇ ਇੱਥੇ ਅਸੀਂ ਨਹੀਂ ਬੰਦੇ ਆਂਗੇ ਆਸਾ ਦੀਵਾਰ ਸੀ ਉਹਦੇ ਉੱਤੇ ਚੰਨਾ ਚੜ੍ਹਦਾ ਬੜੀ ਉਹਦੀ ਮੁਰਦਾ ਬੰਗ ਕੀਤੀ ਸਤਿਗ ਆਪਣਾ ਅਸਨ ਆਪਣੇ ਲਗਾਇਆ ਕੁਝ ਮਿੰਨਿਆਂ ਬਾਅਦ ਉਸ ਥਾਂ ਤੇ ਹੀ ਅਗ ਲੱਗ ਗਈ ਅ ਗੁਰਦੁਆਰਾ ਵੀ ਸਾਰਾ ਸੜ ਗਿਆ ਇਹ ਸਤਿਗੁਰੂ ਇਹਨਾਂ ਸਮਖਿ ਤੁਸੀਂ ਬੜੇ ਭਾਗਸ਼ਾਲੀ ਹੋ ਤੁਸੀਂ ਤੇ ਮੈਂ ਤਹਰ ਤੁਹਾਨੂੰ ਕੀ ਕਹਿ ਸਕਣਾ ਮੈਂ ਤਾਂ ਜੋ ਕੁ ਦੇਖਿਆ ਹੈ ਇੱਕ ਤੇ ਮੇਰੇ ਨਾਲ ਇੱਕ ਲੰਡਨ ਤੋਂ ਆਇਆ ਸੰਤ ਰਤਨ ਚੰਦ ਜੀ ਤੇ ਇਹਨਾਂ ਦੇ ਪਿੱਛੇ ਭਾਈ ਦੀ ਮ੍ਰਿਤਿ ਹੋਈ ਤੇ ਮੈਂ ਇਹਨਾਂ ਦੇ ਘਰ ਅਫਸੋਸ ਕਰਨ ਦਿੱਲੀ ਗਿਆ ਤੇ ਅਫਸੋਸ ਕਰਦੇਗਾ ਤੇ ਮੈਨੂੰ ਤਾਂ ਹੋਰ ਕੁਝ ਆਂਦਾ ਹੀ ਨਹੀਂ ਮੈਂ ਤਾਂ ਸਤਿਗੁਰਾਂ ਦੇ 4-5 ਸਾਕੀਆਂ ਸੁਣਾਤੇ ਆ ਮੇਰੇ ਕਾ 10 ਮਿੰਟ ਲੱਗੇ ਹੋਣੇ ਇਹ ਕਹਿੰਦਾ ਕਿ ਮੈਂ ਤਾਂ ਹੁਣੇ ਦਰਸ਼ਨ ਕਰਨ ਨੇ ਔਰ ਤੀਸਰੇ ਦਿਨ ਚਲੇ ਗਿਆ ਪਹਿਨੀ ਸਾਹਿਬ ਤੇ ਦਰਸ਼ਨ ਕਰਕੇ ਤੇ ਮੈਨੂੰ ਕਹਿੰਦੇ ਮੈਂ ਤਾਂ ਗੁਰਨਾਨ ਦੇਵ ਜੀ ਦੇ ਦਰਸ਼ਨ ਕਰਕੇ ਆਇਆ ਤੇ ਇਹ ਇਹਨਾਂ ਤੇ ਅਸਰ ਹੋਇਆ ਔਰ ਇੱਕ ਬੰਦੇ ਨੂੰ ਮੈਂ ਬੰਦਰਾਸੀ ਸਿਗਾ ਉਹਨੂੰ ਕੋਈ ਪਿਛਲੇ ਸਾਲ ਇਹ ਸਤਗੁਰਾਂ ਦੀ ਇਹ ਪੁਸਤਕ ਉਹਨ ਮੈਂ ਦਿੱਤੀ ਤੇ ਕਹਿੰਦਾ ਇਹ ਕੌਣ ਨੇ ਮੈਂ ਕਿਹਾ ਇਹ 15 ਗੁਰਨਾਨ ਦੇਵ ਜੀ ਨੇ ਉਹਨੇ ਬੜੀ ਸ਼ਰਧਾ ਨਾਲ ਪੁਸਤਕ ਪੜ੍ਹਦਾ ਉਹ ਕਹਿੰਦਾ ਪਿੱਛੇ ਕੀ ਲਿਖਿਆ ਮੈਂ ਕਿਹਾ ਇਹ ਤੇ ਦਾ ਪਾਠ ਲਿਖਿਆ ਹੈ ਸਤਗੁਰ ਪ੍ਰਤਾਪ ਸਿੰਘ ਦਾ ਬਚਨ ਸੀ ਕਿ ਜਿਹੜਾ ਭਗੋਤੀ ਦਾ ਪਾਠ ਕਰਦਾ ਰਹੇ ਉਹਨੂੰ ਦੁਨੀਆਂ ਦੀ ਕੋਈ ਤਾਕਤ ਉਹਨੂੰ ਕੋਈ ਤਕਰੀਫ਼ ਦੇ ਨਹੀਂ ਸਕਦੀ ਸਾਰੀਆਂ ਰੁਕਾਵਟਾਂ ਦੂਰ ਹੋ ਜਾਂਦੀਆਂ ਤੇ ਉਹਨੂੰ ਗੱਲ ਜੱਜ ਗਈ ਉਹਨੇ ਰੋਜ਼ ਭਗੋਤੀਆ ਪਾਠ ਇੱਕ ਇੱਕ ਘੰਟਾ ਕਰਨਾ ਚਾਲੂ ਕੀਤਾ ਉਹਨੇ ਭਜਨ ਕੋ ਨਹੀਂ ਲਿਆ ਸੀ ਉਹ ਤਾਂ ਕਹਿੰਦਾ ਮੇਰੇ ਪਿੰਡ ਹੁਣ ਇੱਕ ਸਾਲ ਬਾਅਦ ਆਇਆ ਕਹਿਣ ਲੱਗਾ ਮੇਰੇ ਪਿੰਡੋਂ ਕੁਝ ਲੋਕ ਆਏ ਇਹਨੂੰ ਕੈਂਸਰ ਦੀ ਤਕਰੀਫ਼ ਹੈ ਮੈਂ ਕਿਹਾ ਵੀ ਬਿਠਾਇਆ ਮੈਂ ਭਗੋਤੀਆ ਪਾੜ ਕੇ ਤਾਂ ਸਤਗੁਰਾਂ ਚਰਨਾ ਅਰਦਾਸ ਕੀਤੀ ਉਹ ਬੰਦਾ ਟੁਰ ਗਿਆ ਬਾਅਦ ਪਤਾ ਲੱਗਾ ਬੰਦਾ ਠੀਕ ਕਰਦਾ ਮੈਂ 40 50 50 ਬੰਦੇ ਬਗਤੀਆ ਪਾਠ ਕਰਕੇ ਸਤਗੁਰਾਂ ਦੇ ਦਰਸ਼ਨ ਕਰਾ ਕੇ ਉਹ ਠੀਕ ਕਰਦੇ ਫਿਰ ਮੇਰੇ ਮਨ ਚ ਆਇਆ ਮੈਨੂੰ ਕੋਈ ਆਗਿਆ ਨਹੀਂ ਮੈਨੂੰ ਮੈਂ ਵਜਨ ਹੀ ਲਿਆ ਇਹ ਤਾਂ ਬੜਾ ਬੜਾ ਪਾਪ ਕਰ ਰਿਆ ਉਹਨਾਂ ਆਇਆ ਤੇ ਮੈਨੂੰ ਕਹਿੰਦਾ ਮੈਨੂੰ ਸਤਗੁਰਾਂ ਦੇ ਦਰਸ਼ਨ ਕਰਾਓ ਅਸੀਂ ਕਾਰ ਤੇ ਸਵੇਰੇ 5 ਵਜੇ ਚੱਲ ਪਏ ਔਰ ਅੱਤੀ ਵਜੇ ਨੂੰ ਵਾਪਸ ਜਾਣਾ ਸੀ ਤੇ 30 ਮਈ ਨੂੰ ਦਿੱਲੀ ਤੋਂ ਬਾਹਰ ਪਹੁੰਚੇ ਤੇ ਉਹ ਕਹਿ ਲੱਗਾ ਮੇਰਾ ਹਾਰਦ ਸਿੰਘ ਕਰ ਰਿਹਾ 75 ਸਾਲ ਉਮਰ ਸੀ ਤੇ ਕੋਈ ਗੱਡੀ ਰੋਕੋ ਸ਼ਾਇਦ ਮੈਂ ਜਾਣ ਹੀ ਪਾਵਾਂਗਾ ਗੱਡੀ ਰੋਕ ਲਈ ਮੈਂ ਸਤਗੁਰੂ ਚੰਨਾ ਅਰਦਾਸ ਕੀਤੀ ਸੱਚੇ ਬਾਸ਼ਾ ਇਹ ਤਾਂ ਬੈਂਗਲੁਰ ਤੋਂ ਆਇਆ ਆਪ ਜ 2 ਮਿੰਟ ਬਾਅਦ ਉਹਨੇ ਅੱਖਾਂ ਖੋਲ੍ਹੀਏ ਕਹਿੰਦਾ ਮੈਂ ਠੀਕ ਆ ਮੈਨੂੰ ਜ਼ਰਾ ਗੰਡਾ ਖਵਾ ਦਿਓ ਮੈਂ ਰਸਤੇ 'ਚ ਪਿਆਜ਼ ਢਾਬੇ ਤੇ ਖਵਾਤਾ ਉਹਨਾਂ ਆਂਦੇ ਪਤਾ ਲੱਗਿਆ ਲ ਜਾਂਦੇ ਪਤਾ ਲੱਗਿਆ ਮੈਂ ਸੱਜੇ ਭਾਈ ਨੂੰ ਦਰਸ਼ਨ ਕਰਾਇਆ ਮੈਂ ਕਿ ਸੱਜੇ ਭਾਈ ਜੀ ਆਪ ਜੀ ਦੇ ਦਰਸ਼ਨ ਕਰਾ ਕੇ ਲੋਕਾਂ ਨੂੰ ਠੀਕ ਕੀਤੀ ਜਾ ਰਿਹਾ ਹੈ ਉਹ ਕਹਿੰਨੇ ਕੋਈ ਨਹੀਂ ਕਰਨ ਦਿਓ ਸਾਡਾ ਕੰਮ ਹੀ ਕਰ ਰਿਹਾ ਕਰਦੇ ਹੋ ਕਰਨ ਦਿਓ ਸੱਜੇ ਭਾਈ ਨੂੰ ਭਜਨ ਦਿੱਤਾ ਬੜੀਆਂ ਉਹਨੂੰ ਖੁਸ਼ੀਆਂ ਦਿੱਤੀਆਂ ਉਹਦਾ ਵਰ ਦੂਜੇ ਦਿਨ ਫੋਨ ਆਂਦਾ ਬੰਗਲੌਰ ਤੋਂ ਤੇ ਕਿਸ ਤਰ੍ਹਾਂ ਕਿਸ ਤਰ੍ਹਾਂ ਸਤਗੁਰਾਂ ਨੇ ਮੈਨੂੰ ਮਿਹਰ ਤੇ ਕਿਰਪਾ ਕੀਤੀ ਹੈ ਤੇ ਬਾਕੀ ਮੈਂ ਆਪ ਜੀ ਨੂੰ ਪਿਛਲੇ ਦੱਸਿਆ ਸੀ ਕਿ ਇੱਕ ਬੰਦਾ ਮੇਰਾ ਕਿਉਂਕਿ ਮੈਂ ਤਾਂ ਸਾਖੀਆਂ ਸੁਣੀਆਂ ਉਸ ਤੋਂ ਮੈਨੂੰ ਪਤਾ ਲੱਗਦਾ ਸਤਗੁਰੂ ਕਿੰਨਾ ਸਮਰਥ ਹੈ ਉਹ ਪਿਛਲੇ ਐਸ ਹੌਲੇ-ਹੌਲੇ ਤੇ ਇੱਕ ਬੀਬੀ ਨੇ ਰੋ ਰੋ ਕੇ ਮੈਨੂੰ ਸੁਣਾਈ ਕਥਾ ਕਹਿੰਦੀ ਮੇਰਾ ਘਰ ਜਿਸ ਤਰ੍ਹਾਂ ਖੁੱਲਾ ਸੀ ਤੇ ਮੈਨੂੰ ਮਾਰਦਾ ਕੁੱਟਦਾ ਤੂੰ ਕਿਉਂ ਸਤਗੁਰੂਆਂ ਕੋਲ ਜਾਣੀ ਹੈ ਕਿਉਂ ਵਕਤ ਪਹਿ ਬਰਬਾਦ ਕਰਨੀ ਹੈ ਤੇ ਮੈਂ 20 ਸਾਲ ਜਾਂਦੀ ਰਹੀ ਉਹ ਮੈਨੂੰ ਕਹਿੰਦਾ ਰਿਹਾ ਇੱਕ ਦਿਨ ਉਹ ਸਵੇਰੇ ਸੌਂ ਕੇ ਉੱਠਿਆ ਕਹਿੰਦਾ ਸੱਚੋ ਸੱਚੋ ਮੇਰਾ ਤਾਂ ਅੱਖ ਨਜ਼ਰ ਨਹੀਂ ਆਉਂਦਾ ਡਾਕਟਰ ਕੋਲ ਲੈ ਕੇ ਕਹਿੰਦਾ ਕਾਲਾ ਮੋਤੀਆ ਹੋ ਗਿਆ ਹੁਣ ਤਾਂ ਕੁਝ ਨਹੀਂ ਹੋ ਸਕਦਾ ਤੇ ਉਹ ਕਹਿੰਦੇ ਮੈਂ 1.5 2 ਮਹੀਨੇ ਉਹਨੂੰ ਰੋਜ਼ ਲੈ ਜਾਵਾਂ ਦੁਕਾਨ ਤੇ ਹੱਥ ਫੜ ਕੇ ਤੇ ਮੇਰੇ ਹੱਥ ਬੜੀ ਮੁਸ਼ਕਲ ਹੋ ਮੈਨੂੰ ਕਹਿੰਦੇ ਮੈਨੂੰ ਸਤਿਗੁਰੂ ਕੋਲ ਲੈ ਚਲ ਮੈਂ ਕਿਹਾ ਤੂੰ ਮੇਰੇ ਸਤਿਗੁਰੂ ਮੰਦਾ ਨਹੀਂ ਮੈਨੂੰ ਅਜੇ ਤੱਕ ਭਜਨ ਨਹੀਂ ਕਰ ਲੈਂਦਾ ਤਾਂ ਹੁਣ ਤੂੰ ਮੈਂ ਤੈਨੂੰ ਕਿਉਂ ਲੈ ਜਾ ਉਹਨੇ ਖੜ ਬੜਾ ਰੋਈ ਉਹਨੇ ਵੀ ਕਿਹਾ ਕਿ ਮੈਂ ਉਹਨੂੰ ਕੀ ਕਰਾਂ ਦੁਕਾਨ ਕਿੱਥਾਂ ਚੱਲੇ ਬੱਚੇ ਕਿੱਥਾਂ ਪਾਲਣਗੇ ਉਹਨੂੰ ਲੈ ਕੇ ਉਹ ਆਪਣਾ ਤੁਰ ਗਈ ਉੱਥੇ ਸਤਿਗੁਰੂ ਪਛਨ ਲ ਵੀ ਕੀ ਕਰੇ ਬੀਬੀ ਸੱਚੋ ਤੂੰ ਬੜੀ ਸਾਡੀ ਸੇਵਾ ਕੀਤੀ ਹੈ ਜਿਹਨੇ ਉਗਰਾਹੀ ਵੱਲ ਜਾਂਦੇ ਤੇਰੇ ਕੋਲ ਰਹਿੰਦੇ ਤੂੰ ਉਹਨਾਂ ਦੀ ਸਾਧ ਸੰਗਤ ਦੀ ਸੰ ਕਹਿੰਦੇ ਸਤਿਗੁਰੂ ਦੀ ਅੱਖਾਂ ਖਰਾਬ ਹੋਏ ਕੋਈ ਗੱਲ ਨਹੀਂ ਅਸੀਂ ਨਵੀਂ ਜੋਤ ਦੇ ਦਿਆਂਗੇ ਇਹ ਭਜਨ ਕਰੇ ਉਹਨੇ ਬਜਰਬਾਣੀ ਚਾਲੂ ਕਰਤੀ ਤੇ ਕੋਈ ਸ਼ਾਇਦ 4 ਮਹੀਨੇ ਲੰਗੇ ਐਸ ਬੋਲੇ ਮਲੇ ਤੋਂ 3 ਹਫ਼ਤੇ ਪਹਿਲੇ ਔਰ ਸਤਿਗੁਰਾਂ ਨੇ ਉਹਨੂੰ ਦਰਸ਼ਨ ਦਿੱਤੇ ਕਿ ਉੱਥੇ ਕਹਿੰਦੇ ਉਹ ਅਗਰਾਈ ਵਾਲੀ ਕੁਰਸੀ 'ਤੇ ਬੈਠੇ ਸਨ ਕਹਿੰਨੇ ਕਿ ਉੱਠ ਆਪਣਾ ਸ਼ਰਨ ਪਾਣੀ ਕਰ ਤੇ ਸਿਮਰਨ ਕਰ ਤੇ 8 ਵਜੇ ਡਾਕਟਰ ਡਾਕਟਰ ਕੋ ਚੜ੍ਹਦਾ ਹਸਪਤਾਲ ਉਹਨਾਂ ਕਹਿੰਦੇ ਜਿਹੜੀ ਦਵਾਈ ਪਾਣੀ ਮੇਰੇ ਅੱਖਾਂ 'ਚ ਪਾ ਦੇ ਉਹਨੇ ਪਾਸਾ ਵਰਤ ਲਿਆ ਕਹਿੰਨੇ ਕਿ ਇਹ ਕਿਸ ਨੇ ਸਤਿਗੁਰੂ ਮੇਰੇ ਕਿਉਂ ਮੈਨੂੰ ਸ਼ਾਇਦ ਗਲਤੀ ਲੱਗੀ ਸਤਿਗੁਰਾਂ ਦੇ ਕੰਨ 'ਚ ਫਿਰ ਤੀਲਾ ਮਾਰਿਆ ਉੱਠ ਕੇ ਖੜਾ ਹੋ ਗਿਆ ਫਿਰ ਉਹਨਾਂ ਕਹਿਆ ਤੈਨੂੰ ਮੈਂ ਕਹਿ ਰਿਹਾ ਮੇਰੇ ਬਚਨ ਸੁਣ ਉਹਨੇ ਉਠਾਇਆ ਕਹਿੰਦਾ ਸੱਚੋ ਸੱਚੋ ਸਤਿਗੁਰੂ ਆਏ ਸਨ ਇੱਥੇ ਕੁਰਸੀ ਬੈਠੇ ਸਨ ਤੇ ਹੁਣ ਅਲੋਪ ਹੋ ਗਏ ਤੇ ਇਹ ਕਹਿ ਗਏ ਉਹ ਕਹਿੰਦੇ ਵੀ ਇਹ ਸਤਿਗੁਰਾਂ ਦੀ ਕਿਰਪਾ ਤੇ ਕਰਤੀ 8 ਵਜੇ ਗਿਆ ਡਾਕਟਰ ਕਹਿੰਦਾ ਕੀ ਕਰਨ ਆਇਓ ਕਹਿੰਨੇਗਾ ਜੀ ਡਾਕਟਰ ਸਾਹਿਬ ਤੁਸੀਂ ਜਿਹੜੀ ਦਵਾਈ ਪਾਣੀ ਪਾ ਦਿਓ ਉਹਨੇ ਇੱਕ ਬੂੰਦ ਉਹਦੇ ਦੋ ਪਾਈ ਉਹਨੇ ਅੱਖ ਖੋਲੀ 2 ਮਿੰਟ ਬਾਅਦ ਉਹਨੂੰ ਸਾਰਾ ਸੰਸਾਰ ਨਜ਼ਰ ਆਣ ਲੱਗ ਪਿਆ ਉਹਨਾਂ ਨੇ ਰੋ ਰੋ ਕੇ ਦੋਨੋਂ ਮੀਆਂ ਬੀਬੀ ਨੇ ਮੈਨੂੰ ਆਪਣੀ ਇਹ ਕਥਾ ਸੁਣ ਤੇ ਮੇਰਾ ਇੱਕ ਮਿੱਤਰ ਸੀ ਮੰਨ 6 ਸਾਲ ਤੋਂ ਮਿਲਿਆ ਨਹੀਂ ਮੈਂ ਉਹਨੂੰ ਫੋਨ ਕੀਤਾ ਮੈਂ ਕਿਹਾ ਤੁਸੀਂ ਕਿੱਥੇ ਹੋ ਹਮੇਸ਼ਾ ਫਰਮਾ ਜੀ ਉਹ ਕਹਿੰਦਾ ਜੀ ਮੈਂ ਤਾਂ ਅਨਾ ਹੋ ਗਿਆ ਮੈਂ ਕਿਹਾ ਕੀ ਹੋਇਆ ਕਹਿੰਦਾ ਮੈਨੂੰ ਡਾਇਬਟੀਸ ਹੈਗੀ ਤੇ ਮੇਰਾ ਡਾਕਟਰ ਮਨਾ ਕਰਤਾ ਮੇਰੇ ਸਪਾਟਸ ਆ ਗਏ ਰੋਟੀਨਾ ਦੇ ਮੈਂ ਕਿਹਾ ਤੁਸੀਂ ਮੇਰੇ ਕੋਲ ਆਓ ਉਹ ਆਇਆ ਕਿਸੇ ਦਾ ਸਾਰਾ ਲੈ ਕੇ ਮੈਂ ਕਿਹਾ ਜੀ ਤੁਸੀਂ ਗੁਨਾਹ ਦੇਵ ਜੀ ਨੂੰ ਮੰਨਦੇ ਹੋ ਕਹਿੰਦਾ ਗੁਨਾਹ ਨਦੀ ਜੀ ਨੂੰ ਕਿਹੜਾ ਪੰਜਾਬੀ ਨਹੀਂ ਮੰਨਦਾ ਮੈਂ ਕਿਹਾ ਇਹ ਗੁਨਾਹ ਦੇਵ ਜੀ ਦੀ ਗੱਦੀ ਦੇ ਵਾਰਸ ਨੇ ਤੁਸੀਂ ਥੋੜੀ ਸ਼ਰਧਾ ਪੈਦਾ ਕਰੋ ਮੈਂ ਤੁਹਾਨੂੰ ਲੈ ਚਲਾ ਇਸ ਤਰ੍ਹਾਂ ਇਸ ਤਰ੍ਹਾਂ ਮੇਰੇ ਸਾਹਮਣੇ ਉਹਨੇ بیبی نے تے انہیں اودے گھر والے سنائیے تے چار دن سوچیا کہ اندی جی میری شردا بن گئی مینوں لے چلو میں لے گیا تے نتنم چلیا سی سچے بادشاہ جی نتنم تے 5 منٹ سامنے بلا لیا کہ میں پیچھے میری سਤھguru کیرپا سਤھguru کیتی میں باج پےنوں اُتھے بھیجوایا سਤھguruں کول او سਤھguru میرے تے کہ آج کا بہت ہی خوشیاں دیندن تے مینوں پچھن لگے باج پے دا کی حال ہے سچے بادشاہ آپ جی دی بہت کرپا ہے کداں آ رہے ہیں میں کہ جلد جی جلد بلاو گے آ جائے گا کہنے لگا کون ہے میں کہ سچے بادشاہ جی نہیں اکھا خراب ہو گیا ان کہنے دسو کی ہویا ਕਹਿੰਦੇ ਜੀ ਮੈਨੂੰ ਡਾਇਬੀਟਿਸ ਹੈ ਤੇ ਕਹਿੰਦਾ ਡਾਕਟਰ ਕੀ ਕਹਿੰਦਾ ਡਾਕਟਰ ਕਹਿੰਦਾ ਕਿ ਭਈ ਹੁਣ ਕੁਝ ਹੋ ਨਹੀਂ ਸਕਦਾ ਮੈਂ ਕਹਿੰਦਾ ਸੱਚੇ ਪਾਤਸ਼ਾਹ ਕਹਿੰ ਕਿ ਮੈਂ ਕੀ ਕਰਨਾ ਸੱਚੇ ਪਾਤਸ਼ਾਹ ਉਹ ਜਿਹੜੀ ਸ਼੍ਰੀ ਗੰਗਾ ਨਗਰ ਵਾਲੇ ਬੀਬੀ ਸੇ ਉਹਦੇ ਘਰਵਾਲੇ ਨੂੰ ਆਪ ਜੀ ਨੇ ਨਵੀਂ ਜੋਤ ਦਿੱਤੀ ਹੈ ਆਪ ਜੀ ਕਿਰਪਾ ਕਰਦੇ ਹੋ ਕਹਿੰਦਾ ਮੈਂ ਕੌਣ ਹਾਂ ਦੇਣ ਵਾਲਾ ਇਸ ਸਤਗੁਰੂ ਕਰਦਾ ਤੋ ਮੇਰਾ ਨਾਂ ਲੱਗਾ ਹੀ ਜਾਂਦੇ ਹੋ ਮੈਂ ਕਿ ਤੁਸੀਂ ਸਤਗੁਰੂ ਹੋ ਤੁਸੀਂ ਸਭ ਕੁਝ ਕਰਨ ਵਾਲੇ ਹੋ ਕਹਿੰਨੇ ਕੋਈ ਨਹੀਂ acha ਇਹਨੂੰ ਕਹੋ ਕਿ ਭਗੋਤੀਆ ਪਾਠ ਕਰੇ ਮੈਂ ਕਿ ਸੱਚੇ ਪਾਤਸ਼ਾਹ ਅੱਖਾਂ ਦੇ ਹੋ ਪਾਠ ਕਰੇ ਇਹ ਤਾਂ ਦੇਖ ਲਈ ਸਕਦਾ ਕਹ ਲੈ ਤੁਸੀਂ ਮੈਨੂੰ ਬਸਾਤਾ ਹੁਣ ਤਾਂ ਦੇਣੀ ਪੈਣੀ ਆ ਅੱਛਾ ਭਜਨ ਭਜਨ ਕਰੇ ਉਸ ਬੰਦੇ ਨੇ 3:30 ਵਜੇ ਉੱਠ ਕੇ ਔਰ ਬਿਨਾ ਨਾਗਾ 2 ਮਹੀਨੇ ਉਸਨੇ ਨਾਮ ਸਿਮਰਨ ਕੀਤਾ 2-2 ਘੰਟੇ ਉਸ ਤੋਂ ਸਾਰਾ ਦਿਨ ਉਹਦੇ ਮਨ ਨੂੰ ਵਿਸ਼ਵਾਸ ਹੋ ਗਿਆ ਕਿ ਇਹ ਮੇਰੇ ਤੇ ਕਿਰਪਾ ਕਰ ਛੱਡੀ ਤੇ 15 ਜੂਨ ਦੀ ਗੱਲ ਹੈ ਮੈਂ ਇਹਨੂੰ ਐਪਰਲ ਲੈ ਕੇ ਗਿਆ 15 ਜੂਨ ਨੂੰ ਕਹਿੰਦਾ ਡਾਕਟਰ ਸਾਹਿਬ ਨੂੰ ਫੋਨ ਕਰਦਾ ਕਿ ਡਾਕਟਰ ਸਾਹਿਬ ਮੇਰਾ ਦਿਲ ਕਰਦਾ ਤੁਸੀਂ ਮੇਰੇ ਅੱਖਾਂ ਟੈਸਟ ਕਰ ਲਓ ਕਹਿੰਦਾ ਤੂੰ ਤਾਂ ਅਗਸਤ ਜਾਣਾ ਸੀ ਚਲ ਤੂੰ ਆ ਜਾ ਪਰਸੋ 17 ਨੂੰ ਉਸ 17 ਤਰੀਕ ਨੂੰ ਚਲਾ ਗਿਆ ਡਾਕਟਰ ਸਾਹਿਬ ਨੇ ਅੱਖਾਂ ਉਹ ਕਿਹਾ ਦਵਾਈ ਪਾਉ ਡੇਢ ਦਉਂਟੇ ਦਵਾਈ ਪਾਈ ਰਹੇ ਉਹਨਾਂ ਨੇ ਫਿਰ ਉਹਦੀ ਟੈਸਟ ਕੀਤਾ ਉਹ ਕਹਿੰਦਾ ਕਿਸੇ ਤੂੰ ਰੱਬ ਨੂੰ ਮੰਨਣਾ ਹੈ ਕਹਿੰਦਾ ਕੀ ਗੱਲ ਕਹਿੰਦੇ ਤੇ ਖੱਬੀ ਆਈ ਸਾਈਡ ਤਾਂ ਵਾਪਸ ਆ ਗਈ ਤੇ ਮੈਂ ਤਾਂ ਕੁਝ ਨਹੀਂ ਕੀਤਾ ਪਰ ਮੈਨੂੰ ਆਣੀ ਵੀ ਨਹੀਂ ਚਾਹੀਦੀ ਮੈਨੂੰ ਸਮਝ ਨਹੀਂ ਆਦਾ ਕਿ ਸਾਇੰਟੀਫਿਕਲੀ ਕੀ ਹੋਇਆ ਉਹਨੇ ਖੈਰ ਉਹਨੂੰ ਐਨਕ ਬਣਾ ਕੇ ਦਿੱਤੀ ਉਹਨੇ ਆਪਣੇ 2 ਸਾਲ ਦੇ ਬਾਅਦ ਆਪਣੀ ਫੈਮਿਲੀ ਨੇ ਪਰਿਵਾਰ ਨੂੰ ਪਹਿਲੀ ਵਾਰੀ ਦੇਖਿਆ ਉਹ ਕਹਿੰਦਾ ਕਿ ਮੈਨੂੰ ਹੁਣੇ ਸਤਕਾਂ ਨੂੰ ਕੋਲ ਮੈਂ ਕਿਹਾ ਵੀ ਕਲীনਗਰ ਤੇਰੀ ਸੱਜੀ ਅੱਖ ਵੀ ਆਂਦੇ ਹੋ ਤੇ ਫਿਰ ਲੈ ਚਲਾਂ ਕਿਰਪਾ ਤੇਰੇ ਤੇ ਹੋ ਰਹੀ ਹੈ ਤੇ ਮੈਂ ਆਨ ਤੋਂ ਇੱਕ ਹਫਤਾ ਪਹਿਲੇ ਉਹਨੇ ਮੈਨੂੰ ਫੋਨ ਕੀਤਾ ਕਹਿੰਦਾ ਜੀ ਮੈਨੂੰ ਲੱਗਦਾ ਮੇਰੀ ਸੱਜੀ ਅੱਖ ਵੀ ਜਾਪਦਾ ਆ ਗਈ ਹੈ ਮੈਂ ਡਾਕਟਰ ਕੋਲ ਗਿਆ ਤਾਂ ਨਹੀਂ ਕਹਿੰਦਾ ਅੱਜ ਮੈਂ ਕਾਰ ਲੈ ਕੇ ਨਿਕਲਿਆ ਮੈਨੂੰ ਘਰ ਵਾਲੀ ਕਹਿੰਨੇ ਤੂੰ ਕਿਉਂ ਜਾਵੇਂ ਕਹਿੰਦਾ ਮੈਂ ਟੈਸਟ ਕਰਨਾ ਕਿ ਮੇਰੀ ਅੱਖਾਂ ਆ ਗਈਆਂ ਕਿ ਨਹੀਂ ਕਹਿੰਦਾ ਮੈਂ 4 ਵਜੇ ਚੱਲਿਆ ਮੈਂ 10 ਵਜੇ ਆਇਆ ਮੈਨੂੰ ਹਰੀ ਬੱਤੀ ਵੀ ਲਾਲ ਬੱਤੀ ਵੀ ਮੈਨੂੰ ਸਾਰੀ ਨਜ਼ਰ ਆਂਦੇ ਦੀ ਤੇ ਇਸ ਨਾਲ ਸਤਿਗੁਰੂ ਨੇ ਮੈਂ 6 ਘੰਟੇ ਗੜੀ ਜਾ ਮੇਰਾ ਕੋਈ ਐਕਸੀਡੈਂਟ ਨਹੀਂ ਆਇਆ ਸਰਜਨ ਕ ਜੀ ਮੈਂ ਤੁਹਾਨੂੰ ਇੱਕ ਬੈਂਕੋਰ ਦੀ ਘਟਨਾ ਦੱਸਣਾ ਮੈਨੂੰ ਸਵੇਰ ਰਿਸ਼ਨ ਸਿੰਘ ਜੀ ਨੇ ਬਚਨ ਕੀਤਾ ਮੈਂ ਤਾਂ ਸਭ ਕੁਝ ਆਪ ਸੰਤਾ ਗੁਰੂ ਸਿੱਖਿਆ ਉਹ ਕਹਿੰਦਾ ਬੈਂਕੋਰ ਇੱਕ ਸੰਤ ਸੰਤ ਨੇ ਮੈਨੂੰ ਨਾਂ ਨਹੀਂ ਪਤਾ ਤੇ ਸਤਗੁਰੂ ਦਾ ਫੋਨ ਆਇਆ ਕਹਿੰਦੇ ਸੂਬਾ ਜੀ ਉੱਥੇ ਕੋਈ ਬੈਂਕੋਰ ਜੇ ਫਰਾਂ ਸੰਤ ਨੇ ਉਹਨੇ ਪੁੱਤਰਾਂ ਦੇ ਕੋਈ ਕਤਲ ਦਾ ਮਕਦਮਾ ਚੱਲ ਗਿਆ ਤੁਸੀਂ ਪਤਾ ਕਰਕੇ ਆਓ ਕਿ ਕੀ ਬਣਿਆ ਤੇ ਉਹ ਉਹਨਾਂ ਨੂੰ ਪਤਾ ਹੀ ਨਹੀਂ ਸੰਤਾ ਨੂੰ ਉਹ ਆਪਣਾ 2000 ਮੀਲ ਚੱਲ ਕੇ ਗਿਆ ਉੱਥੇ 4-5 ਦਿਨ ਪਹੁੰਚੇ ਉਕੇ ਲਗੇ ਸੰਜੀ ਕਹਿੰਦੇ ਸੁਭਾਜੀ ਕਿਦਾਂ ਆਏ ਕਹਿੰਦੇ ਸਤਗੁਰਾਂ ਦਾ ਫੋਨ ਆਇਆ ਤੁਹਾਡੇ ਬੱਚਿਆਂ ਦਾ ਕੋਈ ਕਤਲ ਦਾ ਮਕਦਮਾ ਚੱਲਿਆ ਕਹਿੰਨੇ ਲਗੇ ਰੋਂਣ ਲੱਗ ਪਏ ਕਹਿੰਨੇ ਸਤਗੁਰਾਂ ਨਹੀਂ ਬਖਸ਼ਿਸ਼ ਕਰਦੀਏ ਹੈ ਬੜੀ ਕਰਾ ਤੇ ਕਹਿੰਨੇ ਹੋਇਆ ਕੀ ਕਹਿੰਨੇ ਜੀ ਸਾਡੇ ਬਹੁਤ ਵੱਡਾ ਫਾਰਮ ਹੈ 500 ਏਕੜ ਦਾ ਤੇ ਕੋਈ ਉੱਥੇ ਗੋਰੇ ਲੇਬਰ ਕੰਮ ਕਰਦੀਏ ਮੁੰਡੇ ਵੀ ਕੁੜੀਆਂ ਵੀ ਤੇ ਇੱਕ ਗੋਰਾ ਮੁੰਡਾ ਕੁੜੀ ਨੂੰ ਛੇੜਦਾ ਪਏ ਤੰਗ ਕਰ ਰਿਹਾ ਸੀ ਤੇ ਮੇਰੇ ਪੁੱਤਰਾ ਨੇ ਉਹਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਉਹਨੇ ਸ਼ੋਰ ਵਿੱਚ ਆਇਆ ਉਹਨੇ ਪਿਸਤੌਲ ਕੱਢ ਲਈ ਉਹਨੇ ਗੋਲੀ ਚਲਾ ਦਿੱਤੀ ਉਹ ਲੜਾਈ ਝਗੜੇ ਚ ਉਹ ਗੋਰਾ ਮ ਉਹਨਾਂ ਜਿਹੜੀ ਬੀਬੀ ਹੈ ਪੁਲਿਸ ਫੜ ਕੇ ਲੈ ਗਈ ਉਹ ਕਹਿੰਦੇ ਉਹ ਬਿਆਨਤ ਦੇ ਕੇ ਮੈਨੂੰ ਬਚਾਉਣ ਵਾਸਤੇ ਇਹਨਾਂ ਨੇ ਗੋਲੀ ਚੱਲੀ ਹੈ ਉਹ ਫੜ ਕੇ ਲੈ ਗਿਆ ਖਰ ਜ਼ਮਾਨਤ ਹੋ ਗਈ ਉਹ ਬੱਚੇ ਉੱਥੇ ਹੀ ਪਿਆਦਾ ਹੋਣਾ ਸਤਗੁਰੂਆਂ ਦਾ ਦਰਸ਼ਨ ਕਰ ਦਿੱਤੇ ਹੀ ਨਹੀਂ ਉਹਨਾਂ ਨੇ ਮੱਥਾ ਟੇਕਿਆ ਬਰਦਾਸ਼ ਕੀਤੀ ਸਤਗੁਰਾਂ ਨੂੰ ਸੰਤਾ ਨੇ ਕਿ ਸਤਗੁਰੂ ਸੱਚੇ ਬਾਸ਼ਾ ਮੇਰੇ ਬੱਚਾ ਨੇ ਉਸ ਔਰਤ ਦੀ ਇੱਜ਼ਤ ਬਚਾਉਣਾਂ ਸੇ ਇਹ ਕੀਤਾ ਆਪ ਕਿਰਪਾ ਕਰੋ ਬੱਚਿਆਂ ਦੀ ਰੱਖਿਆ ਕਰੋ ਉਹ ਫਿਰ ਬੱਚੇ ਸੁਣਾਉਂਦੇ ਨੇ ਉੱਥੇ ਬੱਚੇ ਛੁੱਟ ਗਿਆ ਬਰੀ ਹੋ ਗਿਆ ਉਹ ਫਿਰ ਫੋਨ ਘਰ ਆਏ ਕਹਿੰਦੇ ਸੱਚੇ ਬਾਸ਼ਾ ਸਤ ਪਿਤਾ ਜੀ ਬੜੀ ਅਜੇ ਜੀ ਘਟਨਾ ਹੋਈ ਅਜੀ ਜੇ ਸਭ ਜਾ ਰਹੇ ਸਾਂ ਤੇ ਜਿਹੜੀ ਅਸੀਂ ਰੈੱਡ ਲਾਈਟ ਦੇਖੀਏ ਉੱਥੇ ਇੱਕ ਬਾਬਾ ਖੜਾ ਸਾਨੂੰ ਦਿਖਿਖੇ ਜਾਏ ਮੁਸਕਰਾਇਜਾ ਕਿ ਜਿੰਨੀਆਂ ਰੈੱਡ ਲਾਈਟਾਂ ਆਈਆਂ ਸਭ ਵਿੱਚੋਂ ਬਾਬਾ ਸੀ ਉੱਥੇ ਗਿਆ ਤੇ ਜੱਜ ਦੇ ਪਿੱਛੇ ਵੀ ਬਾਬਾ ਖੜਾ ਸੀ ਇਹਨਾਂ ਕਦੀ ਵੇਖਿਆ ਨਹੀਂ ਕਿ ਉਹ ਇਹਨਾਂ ਮੁਸਕਰਾਇ ਜਾਏ ਉਹ ਜੱਜ ਦੋ ਵਾਰੀ ਇਹਨਾਂ ਨੂੰ ਕਮਿਟ ਕਰਨ ਦੀ ਕੋਸ਼ਿਸ਼ ਕੀਤੀ ਇਹਨਾਂ ਅਗੇ ਲਿਖ ਤੋੜਦਿਆਂ ਕੇਸ ਪੜਾ ਉਹ ਜਿੱਥੇ ਲਿਖਣ ਲੱਗੇ ਉਹਦਾ ਪੈਨ ਟੁੱਟ ਜਾਏ ਤੇ ਉਦੋਂ ਜਿਹੜੀ ਬੀਬੀ ਸੀ ਉਹ ਬਿਆਨ ਪਹਿਲੇ ਦੇ ਚੁੱਕੇ ਮੈਂ ਭਈ ਮੈਂ ਇਹਨਾਂ ਨੂੰ ਜਾਣਦਾ ਇਹਨਾਂ ਕੁਝ ਨਹੀਂ ਮੈਨੂੰ ਕੋਈ ਬਚਾਇਆ ਨਹੀਂ ਉਸ ਤੋਂ ਬਾਅਦ 2 ਘੰਟੇ ਬਾਅਦ ਉਹ ਬੀਬੀ ਦਾ ਪਸੀਨਾ ਪਸੀਨਾ ਨਿਕਲਣਾ ਚਲੂ ਹੋਆ ਲੜਕੀ ਆਈ ਕਹਿੰਦੀ ਮੇਰੇ ਤੋਂ ਗਲਤੀ ਹੋਈ ਮੈਂ ਝੂਠ ਬੋਲਿਆ ਇਹਨਾਂ ਤੇ ਮੇਰੀ ਇੱਜ਼ਤ ਬਚਾਉਣ ਦੇ ਵਿੱਚ ਕੀਤਾ ਉਹ ਜੱਜ ਛੁੱਟ ਗਿਆ ਜਿਸ ਵੇਲੇ ਬੱਚੇ ਘਰ ਪਹੁੰਚੇ ਸਾਨੂੰ ਸੁਣਾਈ ਉਹਨੂੰ ਸਤਗੁਰਾਂ ਦੇ ਉਹ ਕਮਰੇ ਲੈ ਕੇ ਸਾਰੇ ਗੁਰੂਆਂ ਦੇ ਉੱਤੇ ਫੋਟੋ ਸੀ ਉਹਨਾਂ ਨੇ ਕਿਹਾ ਕਿਹੜਾ ਸੀ ਬਾਬਾ ਕਰੋ ਸਤਗੁਰ ਜਗਜੀਤ ਸਿੰਘ ਮਹਾਰਾਜ ਜੀ ਬੁਰਾ ਦਨ ਸਤਗੁਰ ਜਗਜੀਤ ਸਿੰਘ ਇਸ ਤਰ੍ਹਾਂ ਉੱਥੇ ਬੈਠੇ ਵਿਨਕੂਰ ਸਤਿਗੁਰੂ ਭੈਣੀ ਸਾਹਿਬ ਬੈਠੇ ਤੁਹਾਡੀ ਕਿਸਾਂ ਰੱਖਿਆ ਕਰਦੇ ਨੇ ਤੁਸੀਂ ਵਿਸ਼ਵਾਸ ਕਰਕੇ ਚਲੋ ਧੰਨ ਸਤਿ